लोक मोहल्ला पहला रुपक में दोस्ती भुखै साधे गंड लंबे मालै घुलमिल मिचले उंग सोड़ पलंग दो सच्चाइयों रे काम ना रुक दियो जो कोई छोरी की देख रहे ਇਹ ਸੱਚਾਈ ਹੈ ਕੁਦਰਤੀ ਗੱਲ ਹੈ ਉਹ ਬਾਤ ਦਾ ਕੰਮ ਪੈਦਾ ਹੋ ਜਾਣੀ ਕੁਦਰਤ ਦੇ ਜੇ ਭੁੱਖਾ ਹੋਵੇ ਤਾਂ ਛੋਲੇ ਵੀ ਮਦਾਨੇ ਲੱਗਦੇ ਨੇ ਜੇਕਰ ਤੇ ਭੁੱਖ ਹੋਵੇ ਕੁਖੜੀਆਂ ਬਾਦੀ ਗੰਡਾ ਹੈ ਜੇ ਭੁੱਖ ਨਾ ਹੋਵੇ ਪਦਾਰਥ ਵਿੱਚ ਜੰਦੇ ਰਹਿੰਦੇ ਲਪਤਾ ਗਾਲੇ ਕੁੰਵਿਲ ਵਾਲ ਜਿਹੜਾ ਹੈ ਦੌਲਤ ਹੈ ਲੱਭ ਕੋ ਘੋੜੇ ਮਲੇ ਰਹਿੰਦੇ ਦੋਏ ਪਰਵਲੀ ਮਿੱਕਲੇ ਉੱਗਾ ਫੌੜੀ ਕਿਸੇ ਨੇ ਜੌਂਦਾ ਹੁੰਦੇ ਵੀ ਵੀ ਕਿਹਦੇ ਨਾਲ ਕਿਸੇ ਨੂੰ ਜਗਾ ਦੇਣੀ ਹੈ ਆਪਣੇ ਕੋਲ ਬੈਠਣ ਦੀ ਪਹਿਲ ਦੀ ਕਾਹ ਹੈ ਬਹੁਤ ਬੱਚਾ ਛੋਟਾ ਵੀ ਹੋਵੇ ਤਾਂ ਵੀ ਜਗ੍ਹਾ ਦਿੱਤੀ ਕਿャ ਕਰਦੀ ਹੈ ਵਿਚਾਰ ਕੇ ਉਹਦਾ ਪ੍ਰੇਮ ਹੋਊਗਾ ਮੇਰੇ ਕੀਤਾ ਦੋ ਸੀਟਾਂ ਘੇਰੀ ਹੁੰਦੀ ਇਹਦੇ ਰੇਲ ਦੇ ਵਿੱਚ ਵਾਗਣ ਆਪਣੀ ਜਗ੍ਹਾ ਵੀ ਹੁੰਦੀ ਤੇ ਕੇ ਉਹਨੂੰ ਉਠਾ ਲਈਂ ਲੋ ਜੀ ੋਂਕੇ ਕੋਪਖਾਰ ਹੋਏ ਫੱਕੜ ਪਿੱਟ ਅੰਦ ਚੁੱਪ ਸੰਗਾ ਨਾਨਕਾ ਵਿਣ ਨਾਮ ਹੈ ਜਦ ਗਰੋਹ ਦੇ ਵਿੱਚ ਜ਼ਿਆਦਾ ਬੋਲਦਾ ਹੈ ਸੰਗਤਾਂ ਨੂੰ ਕੁਛਿਆ ਨਾਲ ਕੋਈ ਜੀ ਨਹੀਂ ਮਿਲਦੀ ਇਹ ਇਹ ਗੁਰਪਸੰਗ ਦਾ ਕੰਮ ਜਿਹੜਾ ਹੁਣ ਹੁੰਦਾ ਨਹੀਂ ਹੁੰਦਾ ਕਿ ਆਹ ਇਹਦੀ ਕੋਈ ਗੱਲ ਨਹੀਂ ਬੁੱਝਦਾ ਫਰ ਹੋਏ ਇਕ ਵਾਰੀਏ ਫਕੜ ਪੱਤੇ ਅੰਦਰ ਇਹ ਦੁਨੀਆ ਦੇ ਲੋਕ ਕਿਉਂ ਨਹੀਂ ਗੁਰੂ ਬੁੱਝਦੇ ਕਿਉਂ ਨਹੀਂ ਧਰਮ ਧਾਲਨ ਕਰਦੇ ਇਹ ਅੰਧੇ ਪਿੱਟਦੇ ਨੇ ਲੋਕਾ ਤੂੰ ਆਪ ਮੰਨ ਲੈ ਤੈਨੂੰ ਜੇ ਰੁਕਣਾ ਤੇ ਕੀ ਲੈਣਾ ਇਹ ਅੰਧੇ ਨੇ ਅੰਧੇ ਪਿੱਟ ਰਹੇ ਆ ਗਿਆਨ ਦਾ ਨੇ ਆਪ ਕੋਈ ਤਰ੍ਹਾਂ ਕੁਬਾਡੂ ਤਿਆਰ ਨਹੀਂ ਤੇ ਦੁਨੀਆ ਨੂੰ ਲਾਉਣਾ ਪਈ ਜਾਂਦਾ ਲੋੜ ਆਪ ਵੱਲ ਹੈ ਕਿਸੇ ਨੂੰ ਕਹਿਣ ਦੀ ਬਹੁਤਾ ਗਲਾ ਫਾੜ ਫਾੜ ਕੇ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪ ਵੱਲ ਆਪ ਰੋਲ ਮਾੜਨ ਬਣਜੋ ਫਰਕ ਤੇ ਦੋ ਗੋੜਾ ਜੇ ਕੋਈ ਪੁੱਛੇ ਉਹਨੂੰ ਦੱਸ ਦੋ ਥੋੜੀ ਬਹੁਤੀ ਗੱਲ ਚੱਲ ਵੀ ਗੱਲ ਕਰ ਦੋ ਉਹ ਵੀ ਜਿਹੜੇ ਧਾਰਮਿਕ ਬੰਦੇ ਨੇ ਬੈਠੇ ਨੇ ਉਹਨਾਂ ਨਾਲ ਗੱਲ ਕਰ ਲੋ ਦੂਤਿਆਂ ਨੂੰ ਕਹਿਣ ਦੀ ਲੋੜ ਨਹੀਂ ਜਿਹੜੇ ਧਰਮ ਨੂੰ ਚਾਹੁੰਦੇ ਨੇ ਗੱਲਾਂ ਕਰਦੇ ਨੇ ਅਸੀਂ ਧਾਰਮਿਕਾ ਕਹਿ ਕਰਦੇ ਕੀ ਭਾਈ ਇਹ ਧਾਰਮਿਕਾ ਆਹ ਗੱਲ ਠੀਕ ਆ ਠੀਕ ਕਿਉਂ ਨਹੀਂ ਕਰਦੇ ਫਿਰ ਜੇ ਨਹੀਂ ਠੀਕ ਸਮਝ ਤੋਂ ਠੀਕ ਕਰ ਲੋ ਚਾਹੁੰਦੇ ਹੀ ਨਹੀਂ ਫਿਰ ਬੈਠੇ ਰਹੋ ਜੀ ਅਤੇ ਫੱਕੜ ਧਾਰਮਿਕ ਬੰਦੇ ਨੂੰ ਕਹੇ ਜੀ ਆਹ ਕਹੀ ਜਾਂਦਾ ਆਪ ਮੰਨਦਾ ਨਹੀਂ ਹੈ ਹਾਂ ਆਪ ਨੇ ਚੁੱਪai ਚੰਗਾ ਨਾਨਕਾ ਵਿਣ ਨਾਮੈ ਮੋਹਗੰਧ ਘਨ ਕਹਦਾ ਚੁੱਪੇ ਸੁਦੀਆ ਸਾਲ ਵਿੱਚ ਨਾਮ ਦੇ ਬਿਦਲ ਜਿਹੜਾ ਕੋ ਚੱਪਾ ਹੋਰ ਕਹਿੰਦੇ ਆ ਦੁਨੀਆ ਤੋਂ ਉਹ ਮੂੰਹ ਦੇ ਵਿੱਚ ਗੰਦੇ ਆ ਗੰਦ ਬਕਣਾਈਆਂ ਦੋ ਗੱਲਾਂ ਹੋ ਗਾਂ ਦੋ ਗੱਲਾਂ ਸੁਣਾ ਕੀ ਫੈਜਾ ਉਹਦੇ ਨਾਲ ਬਕਾਰੇ ਗਦਲ ਦੇ ਕੋਈ ਛੱਤੀ ਦੀ ਡੱਲ ਲਵ ਨੂੰ ਹੈ ਦੱਸਣ ਨੂੰ ਹੈ ਤੇ ਫੇ ਜਿਹੜਾ ਤੁਸੀਂ ਦੱਸੋ ਗਏ ਉਹ ਵੀ ਕੁੱਤਾ ਉਹ ਜਿਹੜਾ ਪਹਿਲਾਂ ਲਈ ਬੈਠਾ ਉਹ ਹੈ ਮਹੱਲਾ ਪਹਿਲਾ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਹਨੀ ਠੱਗੀ ਜਗ ਠਗਿਆ ਕਿਨੇ ਨਾ ਰੱਖੀ ਲੱਜ ਪਤਨ ਦਾ ਰਾਜ ਆ ਗਿਆ ਰਾਜ ਦੇ ਨਾਲ ਮਾਲ ਵੀ ਹੁੰਦਾ ਹੈ ਤੇ ਜੁੜਿਆ ਹੋਇਆ ਹੁੰਦਾ ਹੈ ਦਾ ਰਾਜ ਦੇ ਨਾਲ ਰੂਪ ਵੀ ਜੁੜਿਆ ਹੁੰਦਾ ਹੈ ਜਗਤ ਜੰਗ ਦੇ ਰੂਪ ਜਿਹੜੇ ਨੇ ਰਾਜ ਇਕੱਠੇ ਕਰ ਲੈਂਦੇ ਨੇ ਰਾਣੀਆਂ ਬਣਾ ਲੈਂਦੇ ਨੇ ਕਿਤੇ ਵੀ ਇਕੱਠੇ ਹੀ ਰਹਿੰਦੇ ਨੇ। ਜਾਂ ਤਾਂ ਜੋਗਰ ਚੰਗੇ ਉੱਚੇ ਜਾਂਦਾ ਜੋਗਨ ਜੋਗਨ ਨੌਜਵਾਨ ਚੰਗੇ ਭਰਤੀ ਕਰ ਲੈਣੇ। ਸ਼ਕਤੀ 56 ਠਗ ਇਹ 56 ਠਗ ਦੇ। ਇਹ 56 ਪ੍ਰਾਪਤ ਕਰ ਲੈਣੇ। ਅੱਜ ਢੱਗ ਬਾਰੇ ਕਰ ਫਿਰ ਰਾਜ ਕਰੇਗਾ ਖਾਲਸਾ ਵਾਲੇ 50% ਤੋਂ ਨਹੀਂ ਕਰਦੇ। ਕਿਹਾ ਉਹ ਠੱਗ ਨਹੀਂ ਬੰਦੇ ਜੋ ਠੱਗਦੀ ਬੰਦੇ ਹੈ ਗੁਰੂ ਕੋ ਰਾਜ ਨੂੰ ਠੱਗਦੇ ਨਹੀਂ ਬੰਦੇ ਮਾਲ ਨੂੰ ਠੱਗਦੇ ਨਹੀਂ ਬੰਦੇ ਉਹ ਆਖਿਆ ਕਰੇ ਫਿਰ ਠੱਗਾਂ ਨੇ ਬਣਦੀ ਹੈ ਠੱਗਾਂ ਦਾ ਭਾਈ ਕਹਾਰਾ ਨਾਲ ਇਹ ਤਾਂ ਇਹ ਠੱਗ ਨੇ ਜੇ ਇਹਨਾਂ ਨੂੰ ਠੱਗੋ ਇਹ ਤਾਂ ਠੱਗ ਹੀ ਹੈ ਗੁਰਬਾਣੀ ਦੇ ਬੋਲ ਨੇ ਪੰਜੇ ਠੱਗੋ ਰਾਜਮਾਲ ਰੂਪ ਜੋਗਨਾ ਨਾਜਾਤ ਜੋਗਨਾ ਇਹ ਪੰਜੇ ਠੱਗ ਠੱਗ ਕੇ ਛੋੜ ਗਏ ਨੇ ਤਾਂ ਬੁੱਝਲੇ ਸਾਜ ਖੰਡਾ ਵਾਲਿਆਂ ਦੇ ਭੱਜੀ ਵੀ ਇਹਨਾਂ ਨਾਲ ਬਣਦੀ ਐ ਜਿਹੜਾ ਇਹਨਾਂ ਨੂੰ ਘਰ ਵਾਲੇ ਦੇ ਘਰ ਰੱਖੇ ਹੋ ਆਪ ਵੀ ਠੱਗ ਹੈ ਆਹ ਮਾ ਠੱਗ ਹੈ ਹੋ ਇਹ ਨਹੀਂ ਝੱਲੀ ਜੱਗ ਠੱਗਿਆ ਇਹ ਪੰਜਾ ਘਦਾ ਨੇ ਸਾਰਾ ਜੱਗ ਠੱਗਿਆ ਹੋਇਆ ਸੰਸਾਰ ਠੱਗਿਆ ਹੋਇਆ ਕਿਹਨਾਂ ਦੀ ਇੱਜ਼ਤ ਨਹੀਂ ਬਚੀ ਨਹੀਂ ਬਚੀ ਇੱਜ਼ਤ ਹੁਣ ਜੀ ਸੰ ਨਹੀਂ ਬਚੀ ਕਿਸੇ ਬੇਸਲਦਾਰ ਦੀ ਇੱਜ਼ਤ ਅੱਜ ਦੁਨੀਆਂ ਦੇ ਵਿੱਚ ਰਾਜੇ ਹੋਏ ਨੇ ਕਿ ਇੱਜ਼ਤ ਮਾੜੀ ਮੋਟੀ ਬਚੀ ਅਕਾਲੀ ਖੂਲੋਸੋ ਵੀ ਬਚੀ ਉੱਪਰ ਇਹ ਰਿਹਾ ਠਗਾਂ ਦੇ ਠਗਾਂ ਦੇ ਅਲੱਗ ਰਿਹਾ ਹਾਂਜੀ ਇਹਨਾਂ ਠੱਗਣ ਠੱਗ ਸੇ ਇਹ ਗੁਰਕੀ ਪੈਰੀ ਪਾਹੇ ਨਾਨਕ ਕਰਮਾ ਬਾਹਰੇ ਹੋਰ ਕੀਤੇ ਮੁਠੇ ਜਾਹੇ ਕਿ ਕੈਸੇ ਠੱਗ ਵੀ ਨੇ ਜਿਹੜੇ ਇਹਨਾਂ ਪੰਜਾਂ ਠੱਗਾਂ ਨੂੰ ਛੱਡ ਲੈਣਦੇ ਨੇ ਇਹਨਾਂ ਦੀ ਗ੍ਰੱਪ ਵਿੱਚ ਦੀਉਂਦੇ ਇਹਨਾਂ ਤੋਂ ਕੰਮ ਵੀ ਲੈ ਲੈਂਦੇ ਨੇ ਇਹਨਾਂ ਦੇ ਅੱਖੇ ਵੀ ਨਹੀਂ ਲੱਗਦੇ ਇਹਨਾਂ ਦੇ ਦੇਰ ਨੂੰ ਜਲਦੇ ਹਨ ਆਪਣੇ ਨੇ ਦੇਲ ਰੱਖਦੇ ਨੇ ਇਹਨਾਂ ਦੇ ਅਦੀ ਵੀ ਹੁੰਦੇ ਹੋ। ਜਿਲ ਵਿੱਚ ਅੰਦਰ ਆਪਣੇ ਅੰਦਰ ਮੋ ਨਹੀਂ ਅੰਦਰ ਜਗ੍ਹਾ ਨਹੀਂ ਨੰਦੇ ਇਹ ਲੋ ਰੂਪ ਵਾਸਤੇ ਇੰਨਾ ਠੱਗਣ ਠੱਗ ਸੀ ਠੱਗ ਨੇ ਜਿਹੜੇ ਇਹਨਾਂ ਨੂੰ ਠੱਗ ਲੈਣ ਪੰਜਾਬ ਨੂੰ ਇਹ ਪੈਰੀ ਪਾਏ ਉਹ ਜਿਹੜੇ ਗੁਰਤੀ ਚਾਲੀ ਚੱਲਦੇ ਨੇ ਜਿਹੜੇ ਗੁਰੂ ਸਤਪੁਰ ਤੇ ਜਿਹੜੇ ਗੁਰਬਾਣੀ ਅਨੁਸਾਰ ਚੱਲਦੇ ਨੇ ਉਹ ਇਹਨਾਂ ਠੱਗਾ ਨੂੰ ਠਗੜਵਾਲੇ ਥੱਦਨੇ। ਬਾਣ ਕਰਮਾਂ ਬਾਹਰੇ ਹੋਰ ਕਿਤੇ ਮੁਠੇ ਜਾਹੀਂ। ਬੁਲੰਦ ਦੇਵੀ ਕਹਿੰਦੇ ਕਹਿੰਦੇ ਜਿਹੜੇ ਬਾੜੇ ਕਰਮਾੜੇ ਨੇ ਨਾ ਬਾੜੀ ਬੁੱਧੀ ਵਾਲੇ ਬਾੜੇ ਕਰਮਾੜੇ ਬਾੜੀ ਬੁੱਧੀ ਵਾਲੇ ਉਹ ਕਿ ਬੁੱਧੀ ਕਰਮਪੂਰ ਸਾਡੀ ਹੈ। ਉਹ ਬਾੜੀ ਬੁੱਧੀ ਵਾਲੇ ਨੇ ਜਿਹੜੇ ਗਵੇ ਬੁੱਧੀ ਤੋਂ ਸਖੜੇ ਨਹੀਂ ਜਿਹੜੇ ਔਰ ਕਿਤੇ ਮੁਠੇ ਜਾਣ ਕੰਨ ਹੀ ਇਹਨਾਂ ਦੇ ਕੋਲ ਜੂਏ ਦੀ ਬਾਜੀ ਜਨਮ ਜੂਏ ਕੇ ਚਲੇ ਗਏ ਇਹਨਾਂ ਦੇ ਤੱਕੇ ਧੇ ਚੜੇ ਹੋਏ ਚ ਹਾਰ ਗਏ ਇੱਥੋਂ ਮੁਠੇ ਜਾਣ ਹਾਂਜੀ ਇਹਦੇ ਬਿਲਕੁਲ ਇੱਕ ਬਰਾਬਰ ਦਾ ਸ਼ਲੋਕ ਬਾਵਨ ਅਖਰੀ ਚ ਭਗਤ ਕਬੀਰ ਜੀ ਦਾ ਵੀ ਹੈ ਹੈ ਜੀ ਠੱਗ ਠਗਿਆ ਤਗਲ ਜਗ ਖਾਵਾ ਸੋਸ ਠਗ ਠਗਿਆ ਠੋਰ ਮਨਾਵਾ ਹੈ ਜੀ ਇਹੀ ਗੱਲ ਗੁਣਾਣ ਸਿੰਘ ਸਾਹਿਬ ਵੀ ਕਹਿ ਰਹੇ ਇੱਥੇ ਹਾਂ ਜੀ ਹਾਂ ਇਹ ਨਾ ਜਿਆਦਾ ਖੋਲ ਕੇ ਕਹਿੰਦੀ ਉਹਦੇ ਉਹਨੂੰ ਥੋੜੀ ਜੀ ਵਾੜ ਰੱਖ ਕੇ ਗੱਲ ਕਹਿੰਦੀ ਸੀ ਥੋੜੀ ਇਹਨਾਂ ਨੇ ਜਿਆਦਾ ਖੁਲਾਸਾ ਕਰਤਾ ਉਸੇ ਗੱਲ ਦਾ ਠੀਕ ਹੈ ਜੀ ਤੇ ਗੁਰਮਤਿ ਉਹਨਾਂ ਨੇ ਹੀ ਹੈ ਜਿਨ੍ਹਾਂ ਨੇ ਇਹ ਠੱਗਾਂ ਠਗ ਲਿਆ ਹੈ ਬਿਲਕੁਲ ਦਿਸਾਂਦੀ ਹੈ ਨਾਣਕ ਕਰਮ ਬਾਹਰੇ ਤੋਂ ਕੀ ਭਾਵ ਬਣਦਾ ਜੀ ਕਰਮਾਂ ਬਾਹਰੇ ਨੇ ਅਕਲ ਨੇ ਤੇ ਅਗਲੀ ਦੇ ਕੰਮ ਕਰਦੇ ਰਹੇ ਨੇ ਜਿਹੜੇ ਕੰਮ ਆਏ ਸੀ ਉਹਦੀ ਕੀਤਾ ਜਦੋਂ ਆਏ ਸੋਈ ਰੂਪ ਇਹਦੇ ਪਿੱਛੇ ਲੱਗੇ ਨੇ ਪਤੋ ਸਖਣੇ ਸੀ ਹੋਰ ਕੀ ਹੋਗੀ ਪੌੜੀ ਪੜਿਆ ਲੇਖੇਦਾਰ ਲੇਖਾ मांगी है बिन नामे कूड़ियार औखा तंगी है ओ जे पढ़या लिखे तू लेखेदार ਲੇਖਾ भी लेखा लिखी जंदे लेखा ही मुगया जाउदा ਦੇਖ ਲੈ ਰਿਹਾ ਪੁੱਤ ਬਾਪ ਦਾ ਦੇਖਾ ਨੂੰ ਉਸੇ ਤੇ ਲੇਖਾ ਪੁੜੇ ਜਉ ਉਸੇ ਤੇ ਲੇਖਾ ਪੁੜੇ ਜਾਂਦਾ ਨਹੀਂ ਤਾਂ ਨਾਨਕ ਜਣ ਦਾ ਲੇਖਾ ਪਾਟਿਆ ਉਹਦਾ ਲੇਖਾ ਪਾੜ ਜਾਂਦਾ ਗੁਰਮੁਖਾਂ ਦਾ ਗਿਆਨ ਨਹੀਂ ਹੈ ਨੇ ਉਹ ਜਿਹੜਾ ਲੇਖਾ ਲਿਖਦੇ ਤੇ ਬਿਨਾਂ ਮੂੜਿਆ ਆਰ ਔਕਾ ਤੰਗੀ ਐ ਬੜੀ ਤੰਗੀ ਹੋਊਗੀ ਗਾਂ ਜਾ ਕੇ ਔਖੇ ਹੋਣਗੇ ਜਾ ਕੇ ਮਰਾ ਭੀੜੇ ਜਾਵਣਾ ਉਹਨਾਂ ਵਾਸਤੇ ਇਹ ਤੁਹਾਿੰਦਾ ਆਰਫ ਦੇ ਚੰਲੇਖਾ ਨਾਲ ਲਿਖਦੇ। ਜਿਹੜੇ ਲੇਖਾ ਲਿਖਦੇ ਨੇ ਉਹ ਨਾਮ ਤੋਂ ਸਖਣੇ ਲੈਦੇ ਲਾੜਾ ਕੂੜਿਆਰ ਕੂੜਿਆ ਬਾਯਾ ਦਾ ਰੀਡ। ਔਕਾ ਤੱਬੀਏ ਔਕੇ ਹੋਣਗੇ। ਸੰਭ ਰਾਹ ਗਲੀਆਂ ਰੋਕੀਆਂ ਸੱਚਾ ਵੇ ਸ਼ਬਦ ਸੰਤੋਖੀਆਂ। ਔਕਟ ਰੁਤੇ ਰਾ ਗੋੜੇ ਰਾ ਰੁਤੇ ਹੋਏ ਔਕਟ ਨੇ ਔਕਟ ਕਾਟੀ ਉਲਟੇ ਰਾਹ ਦੇ ਵੜੇ ਗਲੀਆਂ ਰੋਕੀਆਂ ਤੰਗ ਗਲੀਆਂ ਨੇ ਤੰਗ ਗਲੀਆਂ 'ਚ ਰੁਦਣਾ ਪਊਗਾ ਰਿਹਾਵਟਾ ਬਹੁਤ ਨੇ ਸੱਚਾ ਬੇਪਰਵਾਹ ਸੱਚਾ ਜਿਹੜਾ ਹੁੰਦਾ ਬੇਪਰਵਾਹ ਹੁੰਦਾ ਹੈ ਸੱਚੇ ਬੇਪਰਵਾਹ ਨੇ ਸੰਦੋਖੀ ਵਾਸਤੇ ਉਪਦੇਸ਼ ਦਤਾ ਕਿ ਉਹ ਰਾਹੀ ਪਹਿਣਾ ਮਾਇਆਧਾਰੀਆਂ ਦੇ ਔਕਟਰ ਰੁਧੇ ਰਾਹ ਦੇ ਵਿੱਚ ਨਹੀਂ ਜਾਣਾ ਹੈ ਉਧਰ ਰੁਣ ਨੂੰ ਕੂਹੇ ਰਸਤੇ ਜਾਣਾ ਹੈ ਕਿਹੜੇ ਸੱਚਾ ਦੇ ਪ੍ਰਵਾਹ ਸੱਚ ਦੇ ਰਾਹ ਜਾਣਾ ਹੈ ਜਿਹੜਾ ਬੇਪਰਵਾਹ ਹੈ ਸ਼ਬਦ ਉਹਦਾ ਜਿਹੜਾ ਉਪਦੇਸ਼ ਹੈ ਸੰਤੋਖੀ ਵਾਸਤੇ ਹੈ ਜਿਹਨੇ ਉਪਦੇਸ਼ ਸੁਣਿਆ ਗੁਰਬਾਣੀ ਦਾ ਉਹਨੂੰ ਸੰਤੋਖਾ ਹੋ ਗਿਆ ਉਹਨਾਂ ਰਾਜਮੁਗਦਾ ਨਾ ਰਾਜ ਦੀ ਇੱਛਾ ਨਾ ਭੌਲ ਦੀ ਇੱਛਾ ਨਾ ਰੂਪ ਦੀ ਇੱਛਾ ਨਾ ਜਾਤੀ ਉਦੇ ਕੋਲ ਜਾਨ ਵੀ ਕੋਈ ਵੈਲੀ ਹੋਇਆ ਜੋ ਬੰਦੀ ਚੱਲ ਉਹਦੇ ਕੋਲ ਪੰਜਾਂ ਦੀ ਚਾਹ ਦੀ ਸੀ ਪੰਜਾਂ ਦੀ ਉਹ ਖੁਕ ਦੀ ਹੈ ਪੰਜਾਂ ਦੀ ਖਾਓ ਕੋਈ ਨਾ ਛੁੱਟ ਸੀ ਯਾਰ ਇਹ ਤਾਂ ਹੀਰਾ ਬਹੁਤ ਗਹਿਰੀ ਦੀ ਗੱਲ ਹੈ ਜੈਰੀ ਹੈ ਗੱਲ ਬਹੁਤ ਗਹਿਰੀ ਹੈ ਨਬੀਰੇ ਕਬੀਰੇ ਕਬੀਰ ਤਾਂ ਸਮਝ ਆਉਂਦੀ ਹੈ ਇਹ ਕਿਹਦਾ ਕੋਈ ਗੰਭੀਰ ਹੈ ਨਹੀਂ ਘਰ ਕੋਈ ਆਖ ਵੀ ਗਭੀਰ ਹੈ ਘਰ ਮਤਨ ਕੋਈ ਨਹੀਂ ਸਮਝਦਾ ਬਹੁਤ ਗਹਿਰੀ ਗੱਲ ਆਪਣੀ ਬਾਣੀ ਦੀ ਗੱਲ ਆਪਣੀ ਬੋਲੀ ਚ ਆ ਇਹ ਤਾਂ ਗੱਲ ਹੀ ਕੋਈ ਖਾਸ ਦੀ ਆ ਤਾਂ ਲੱਭੀ ਆਪਣੇ ਨਹੀਂ ਬਸਦੀ ਗੱਲ ਬੋਲਦੇ ਆ ਕਿਤੇ ਵੀ ਲੱਭ ਜਵੇ ਇਹਦਾ ਥੋੜਾ ਜਿਹਾ ਪਤਾ ਲੱਗ ਜਵੇ ਆਪਣੇ ਮਨੁੱਖੀ ਦੇ ਦੱਸਦੀ ਗੱਲ ਨਹੀਂ ਇਹ ਸਮਝ ਚਾਜਵੇਂ ਗੁਰਬਾਨੀ ਹੱਥ ਨਾਲ ਲੱਭੀ ਇਹਦਾ ਹੱਥੇ ਨਹੀਂ ਕੋਈ ਥਾਏ ਨਹੀਂ ਕੋਈ ਲੱਭੂ ਕਿਥੋਂ ਜਾਈ ਤਿੱਦੀ ਹੈ ਮੂਹੇ ਮੋਟਾਂ ਆਪਣੇ ਆਪ ਦੀ ਲੱਭਦਾ ਆਪਣੇ ਆਪ ਦੀ ਸਮਝ ਆਉਂਦਾ ਸ਼ਬਦ ਵਿਚਾਰ ਤੋਂ ਬਿਨਾਂ ਜਾਨ ਦੀ ਸਮਝ ਆਉਂਦਾ ਇਹਦਾ ਉਹ ਵੀ ਪਰਮੇਸ਼ਰ ਕਰਤਾ ਦੇ परमेश्वर दी कृपा भोग अपनी बाकन छोटी करके चले ता एदी समझ पल्ले पवे फिर जान दे नाल छुटकारा हो सकदा है बिना जान दे भी छुट सकदा जम दे जाल चो पावसा करछु हां जी पत् सेती घर जाओ नाम बखानी है हुक्मी साह गिरा जानी है अपने इज्जत लेके बचा के घर चले जाओ ਨਾਮ बखਾਨਿਆ ਨਾਮ ਦੀਪ बखਾਨ ਕਰਕੇ ਨਾਮ ਦਾ बखਾਨ ਕਰ ਲੋ ਜੇ ਨਾਮ ਦਾ बखਾਨ ਕਰ ਸਕੋਗੇ ਨਾਮ ਨੂੰ ਸਮਝ ਸਕੋਗੇ ਨਾਮ ਨੂੰ ਸਮਝਾ ਸਕੋਗੇ ਤਾਂ ਸਮਝਦੋ ਪਾਸੇ ਦੀ ਘਰ ਚਲੇ ਆ ਪਾਸੇ ਦੀ ਘਰ ਜਾਣ ਦੀ ਐਵੇਂ ਨਹੀਂ ਜਾ ਸਕਦੇ ਐਵੇਂ ਨਹੀਂ ਜਾ ਸਕਦੇ ਸੰਤਾ ਨੇ ਕਿਰਪਾ ਕਰਤੀ ਸਤੇ ਹੱਥ ਰਖ ਤਵਲ ਬਲੇ ਬਲੇ ਹੋਗੀ ਇਹ ਸਭ ਬਖੰਡ ਨੇ ਹੁਕਮ ਹਿਸਾ ਗਰਾਓ ਜਾਣੀ ਹੈ ਆ ਜਿਹੜਾ ਸਾਹ ਹੈ ਨਾ ਆਉਂਦਾ ਇਹ ਤਾਂ ਉਹ ਕੋਲੋਂ ਆਉਂਦਾ ਹੈ। ਕਹਿੰਦਾ ਜਾਣੀਏ ਜਿਹੜਾ ਸਾਹ ਦੇ ਰਿਹਾ ਉਹ ਨੂੰ ਜਾਣਣ ਦੀ ਲੋੜ ਹੈ ਸਾਹ ਆਉਂਦਾ ਕਿੱਥੋਂ ਹੈ ਕੌਣ ਦੇ ਰਿਹਾ। ਜਿੰਨਾ ਚਿਰ ਪਤਾ ਕੌਣ ਦਿੰਦਾ ਆਉਂਦਾ ਕਿਉਂ ਚਿਰ ਤੇ ਬਖਿਆਨ ਬਣੀ ਹੋ ਸਕਦਾ ਇਹਦਾ। ਆਪਣੇ ਗੂੜ ਦੀ ਪਛਾਣ ਕਰੋ ਆਪਣੇ ਗੂੜ ਦੀ ਪਛਾਣ ਤੇ ਨਾ ਗੂੜ ਨਾਲ ਜੁੜੇ ਤੇ ਬਿਨਾਂ ਇਹੋ ਛੁਟਕਾਰਾ ਨਹੀਂ ਹੈ। ਗੂੜ ਨਾਲ ਜੁੜੇ ਤੇ ਛੁਟਕਾਰਾ ਮੂਰਦੀ ਪਛਾਣ ਆਏ ਤੇ ਮੂਰਦੇ ਦਰਸ਼ਨ ਦੇ ਨੋ ਟਟਕਾ ਦਾ ਮੁਖਮੀ ਸਾਹ ਗਿਰਾਹ ਦੇਂਦਾ ਜਾਣੀ ਐ ਇੱਥੇ 23ਵੀਂ ਪੌੜੀ ਸਮਰਤੀ ਹੈ ਜੀ ਜੀ